ਜਦ ਲਸ ਜਾਣੇ ਕੋਈ ਤੇ ਕਸ਼ ਹੋਏ ਤਬ ਇਸ ਕੋ ਸੁਖ ਨਹੀਂ ਕੋਏ ਜਦ ਇਹ ਜਾਣੇ ਮੈਂ ਕਸ਼ ਕਰਦਾ ਤਬ ਲਗ ਜੋ ਗਰਭ ਜੋਨ ਮੈਂ ਫਿਰਦਾ ਹਾਂ ਜਦੋਂ ਤੱਕ ਜੀਵ ਇਹ ਚਾਹੁੰਦਾ ਵੀ ਮੈਂ ਤੋ ਕੁਝ ਹੋ ਸਕਦਾ ਨੂੰ ਕੁਝ ਕਰ ਸਕਦਾ ਅਸਤੇ ਸਕਦਾ ਅਸਰ ਕਰਦਾ ਹੈ ਹੀ ਹੈ ਜੇ ਠੀਕ ਹੈ ਪਰ ਕਰਾਉਣ ਵਾਲਾ ਕੋਈ ਹੋਰ ਹੈ ਉਹ ਤੇ ਕਰਾਏ ਬਿਨਾਂ ਨਹੀਂ ਕਰਦਾ ਜਿਨਾਗਰ ਪਰਮੈਸ਼ਰ ਦੀ ਇੱਛਾ ਨਹੀਂ ਹੋਵੇ ਤਾਂ ਮੌਜੂਦੇ ਨਹੀਂ ਕਰਦਾ ਪਰ ਮੋੜ ਉਹਦੇ ਹੱਥ 'ਚ ਇਹਨੂੰ ਪਤਾ ਹੈ ਦੇ ਹੱਥ 'ਚ ਹੈ ਨਾ ਪਤਾ ਵੀ ਲੱਗ ਜਾਂਦਾ ਜੇ ਧਿਆਨ ਦਵੇ ਤਾਂ ਪਤਾ ਲੱਗਣ ਲੱਗ ਜਾਂਦਾ ਆਲੇ ਪਰ ਮਾਇਰਾ ਦਾ ਹੈ ਵੀ ਜੇ ਆਪਣੇ ਅੰਦਰ ਉਸਲਾਹ ਆਪ ਬਣਾਉਣੇ ਹੈ ਧੌੜਨਾ ਕਦੇ ਬਣਾਉਣੇ ਹੈ ਕਦੇ ਧੌੜਨਾ ਹੈ ਜਦੋਂ ਬਣ ਜਾਂਦੀ ਆ ਉਹ ਕੀ ਵੀ ਗੱਲ ਹੁੰਦੀ ਐ ਜਦੋਂ ਤਾਂ ਕਹੇ ਸਮਝਦਾ ਬੁੱਤੇ ਮੈਥੋਂ ਕੁਝ ਹੋ ਸਕਦਾ ਹੈ ਤੇ ਇਹਦਾ ਮਤਲਬ ਇਹ ਵੀ ਮੰਨ ਲੈਂਦਾ ਵੀ ਪਰਮੇਸ਼ਰ ਦੀ ਸਭ ਕੁਝ ਕਰਦਾ ਸਭ ਕੁਝ ਲੋਕੋ ਕੇ ਕਰਦੇ ਆਂ ਅਸੀਂ ਜੀਅ ਕਰਦੇ ਆਂ ਉਸ ਉਸ ਦਾ ਆਪਣਾ ਪਰਮੇਸ਼ਰ ਦੀ ਫਿਰ ਕੋਈ ਚੀਜ਼ ਰਹਿ ਹੀ ਨਹੀਂ ਜਾਂਦੀ ਐ ਇਸ ਨਾਲ ਫਿਰ ਕੋਈ ਨਹੀਂ ਪਰ ਮਨ ਜਲਦੀ ਲੋੜ ਕੀ ਰਹੀ ਜੇ ਫਰਦ ਦੋ ਜੀ ਆਪਾਂ ਤਾਂ ਕੁਝ ਯਾਦ ਕਰਿਆ ਸੂਰਜ ਜਿਹਾ ਸੀ ਬਣਾਇਆ ਇਹ ਸਾਡੀ ਮਰਜ਼ੀ ਨਾਲ ਬੈਠਾ ਸਾਡੀ ਮਰਜ਼ੀ ਨਾਲ ਕੁਝ ਹੋਣੀ ਜਾਂ ਇੰਨਾ ਕੁਝ ਹੋਰ ਹੈ ਜਿਹੜਾ ਸਾਡੀ ਮਰਜ਼ੀ ਨਾਲ ਨਹੀਂ ਹੋ ਰਿਹਾ ਉਹ ਵੀ ਸਾਡੀ ਮਰਜ਼ੀ ਨਾਲ ਹੋ ਜਾਏ ਕਿ ਐਵੇਂ ਜਿਸੀ ਕੋ ਬੇਕੂਫੀ ਦਾ ਅਗਿਆਨਤਾ ਦਾ ਸਵਾਲ ਪਾਇਆ ਹੋਇਆ ਅਗਿਆਨਤਾ ਦੀ ਇੱਕ ਧਾਰਨਾ ਸਾਡੀ ਹੈ ਬਦਲੇ ਆਸੀਆਂ ਅਸੀਂ ਕੁਝ ਕਰ ਸਕਦੇ ਕਿੰਨਾ ਜ਼ਰਾ ਆਤਮੇ ਸਮਝਾ ਕੁਝ ਕਰ ਸਕਦਾ ਹਾਂ ਉਹਨਾਂ ਜਿਹਦੇ ਗਿਆਨ ਚ ਕਵੀ ਹੋ ਕਵੀ ਗਿਆਨ ਤੇ ਕਵੀ ਵਾਲਾ ਸਾਧ ਗੰਡੀ ਜਿਹੜਾ ਹੋ ਉਹ ਪੂਰੇ ਗਿਆਨ ਵਾਲੇ ਨੇ ਜਿੰਨਾ ਚਿਰ ਕੋਈ ਗਿਆਨ ਦੀ ਕਮੀ ਹੋ ਨਾ ਜਿਹੜੇ ਨਾਲ ਚ ਕਾਲਾ ਹੈ ਤਾਂ ਉਹਨਾਂ ਕਹੇ ਮੂਕੜਾ ਜਿਹੜਾ ਬਾਹਰ ਪਾਸਾ ਕਾਲਾ ਹੈ ਬਾਹਲਾਪਾਸੇ ਦੇਖਣਾ ਕਿਸ ਕੋਈ ਵੀ ਸਾਡਾ ਚਮੜਾ ਦੇਖਦਾ ਹੈ ਚਮੜੀ ਦੇਖਦਾ ਵਾਰੋ ਚਮੜੀ ਦੇ ਜੋ ਵੀ ਕਾੜ ਸ ਹੈ ਸਾਗ ਦੇ ਚਮੜੀ ਦਾ ਉਹ ਹੀਰੋ ਬਣਾਇਆ ਜਾਂਦਾ ਚਮੜੀ ਦੇ ਥੱਲੇ ਜੋ ਮਰਜੀ ਚਮੜੀ ਉਤੋ ਸਾਡੀ ਬੱਕਰੀ ਬੱਕਰੀ ਸਾਰਿਆਂ ਦੀ ਤੇ ਚਮੜੀ ਲਾ ਲਈ ਥੱਲੇ ਕੋਈ ਹਦੂ ਉਹ ਜੇ ਮਾਸਾ ਰਮੋੜੋ ਹੀ ਜਿਉੜੇ ਉਹ ਜੇ ਫੂਨ ਰਮੋੜੋ ਹੀ ਜਿਉੜੇ ਤੇਰੀ ਭਰਕਾ ਐਵੇਂ ਜਿਹੜਾ ਪਾਣਾ ਬਾਹਰਲਾ ਪਾਸਾ ਜਿਹੜਾ ਸਾਡਾ ਉਹ ਪਰਮ ਬਾਹਰਲੇ ਪਾਸੇ ਪਰਮੂਦਾ ਜਿਹੜਾ ਜੀ ਮਨ ਮੈਂ ਪਰਮ ਕਹਨੇ ਆ ਇਹ ਸਮਝਣ ਵਾਲੀ ਗੱਲ ਹੈ ਬੜੀ ਧੀਆ ਮਨ ਕੋ ਜਿਨੀ ਧੀਆ ਉਹਰੋ ਜਗਾ ਤਰੋਂ ਸਾਡੇ ਜਿਹੜਾ ਗੁਰਖੀ ਤੋਂ ਜਿੰਨੋ ਜਿੱਥੇ ਜਿੱਥੇ ਪੈਦਾ ਹੁੰਦੀ ਹੈ ਇੱਛਾ ਬੈਦਾ ਹੁੰਦੀ ਹੈ ਚਿੰਤਾ ਪੈਦਾ ਹੁੰਦੀ ਹੈ ਉਹ ਜਿੰਨਾ ਤੋਂ ਕਾਲਾ ਗਿਆਨ ਤਾਂ ਉਹਦਾ ਨਾਮ ਹੈ ਹੈ ਮੈਨ ਕੋਈ ਹੈ ਤਾਂ ਬੁਦਿ ਕੋਈ ਕੋ ਜਿੰਨਾ ਕਾਲਾ ਉਹ ਨਾ ਬੰਦੂ ਮਝੂਠਾ ਮਝੂਠਾ ਜਿਮ ਜੋ ਹੈ ਉਹ ਝੂਠਾ ਜਨਾ ਕਾਲਾ ਹੈ ਉਹ ਹਨੇਰਾ ਕਾਲਸ ਸੱਚ ਚਿੱਟਾ ਹੈ ਸੱਚ ਕਾਲਾ ਨਹੀਂ ਹੁੰਦਾ ਅਕਲ ਜਦੋਂ ਸਚਾਰਾ ਹੋ ਜਾਣਾ ਚਿੱਟਾ ਹੋ ਜਾਣਾ ਅਕਲਕ ਮਟ ਜਾਣਾ ਫਿਰ ਮਨ ਕੋਈ ਹੈ ਉਹ ਨਾ ਮੰਦਾ ਇਸਾਝੂਠਾ ਹੈ ਦੁਨੀਆਂ ਉੱਨਾ ਮੰਦ ਸਜਿਆ ਗਿਆ ਅੰਤਮ ਨੇ ਕੋਈ ਨਹੀਂ ਦੋ ਰੂਪ ਨੇ ਉਹਦੇ ਕੁਛ ਐਸਾ ਕਾਲਾ ਹੈ ਉਹ ਜਦੋਂ ਕਾਲ ਜੱਤੀ ਗਈ ਸਾਰਾ ਜਿੱਟਾ ਹੋ ਗਿਆ ਸਰਾਬ ਹੋ ਗਿਆ ਉਹਦਾ ਮਨ ਕਰਿਆ ਜਾਂਦਾ ਹੁੰਦਾ ਹੁਣ ਵੀ ਇੱਕ ਹੀ ਹੈ ਕਿ ਕਿਉਂ ਕੋਈ ਕੁਝ ਹੋ ਜੇ ਨਹੀਂ ਰਾਜੂ ਉਠਾ ਅਗਰ ਅਗਰ ਮੌਸਨੇ ਰੇਦੀ ਹੋਣੀ ਚਾਹ ਲੋੜੀ ਫਤੂ ਜੋ ਤੁਮ੍ਹੇ ਜਗੰਦੀ ਨੇ ਰਾਮ ਨੇ ਕਰੀ ਦੇਣਾ ਮੇਰਾ ਕੀ ਨੇ ਰਾਮ ਆਇਆ ਦਰੂਪ ਇਹ ਜਗਤ ਨੂੰ ਦਾ ਪਹਾੜ ਅਸੋ ਛਾਇਆ ਏ ਇਹ ਛਾਇਆ ਹੈ ਛਾਇਆ ਝੂਠੀ ਜਗਤਪੁਰਾਣਾ ਝੂਠੀ ਏ ਖਾਲੀ ਏ ਇਹਦੇ ਪਿੱਛੇ ਸੱਚ ਨਹੀਂ ਹੈ ਖਾਲੀ ਦਾ ਬੰਦਾ ਸੱਚੀਆਂ नहीं है। ਵਿੱਚ ਨੇ ਰਹਿੰਦਾ ਆਤਮਾ ਦੀ ਜਾਂ ਇਹ ਕੋਸਤੂਆਂ ਜੇ ਹੋਵੇ ਫੱਜੀਏ ਵਿੱਚ ਮੇਰਾ ਹੁੰਦਾ ਹੈ ਘੜੇ ਦੇ ਜੇ ਤਾਂ ਖਾਲੀ ਹੋਈ ਜਾਂ ਜੇ ਵਿੱਚ ਵਸਤੂ ਪਰ ਤਾਂ ਫੇ ਨੇ ਰਹੇ ਅਸਲ ਤੇ ਵੀ ਜਿਮਾਨੇ ਕੋਈ ਹੈ ਉਹ ਚੇਤ ਸੇ ਜਿਹੜੇ ਕਿਨੇ ਰਹਿ ਬਹਾਲ ਦੇ ਪਾਸੇ ਨੇ ਰੋ ਬਨ ਬਹਾਲ ਦੇ ਪਾਸੇ ਆ ਸਾਡਾ ਆ ਸ਼ਰੀਰ ਵੀ ਬਹਾਲ ਦੇ ਪਾਸੇ ਆ ਸਾਡਾ ਤਾਂ ਇਹਨਾਂ ਨੂੰ ਬਹਾਲ ਲਾਭੂਦ ਕਹਿੰਦੇ ਬਹਾਲ ਮਨ ਕਹਿੰਦੇ ਕਹਿੰਦੇ ਉਹ ਜਿਹੜਾ ਬਹਾਲ ਪਾਸਾ ਬਹਾਲ ਦਾ ਮਰਮਾਇਆ ਵਾਝਾ ਹਕਦਾ ਸੀ ਬਾਰੇ ਨਿਹਰੇ ਚਾਹਨ ਘੋਲਨੀ ਹੈ ਜਿੱਦਾਂ ਚਾਹਨ ਸਾਧਨ ਚਾਹੀਦਾ ਤਾਰ ਉੱਪਰ ਆਕਾਸ਼ ਮੁੱਚੇ ਸਾਧ ਤੱਕ ਹਰਮ ਚਾਹਨ ਹੈ ਉੱਤਰ ਬਾਕੀ ਸਾਨੂੰ ਕੋਈ ਗਿਆਨ ਨਹੀਂ ਹੈ ਪਤਾ ਨਹੀਂ ਆਦਮੀ ਕਿੱਥੇ ਤੱਕ ਦੁਨੀਆ ਕੀ ਹੈ ਕੋਈ ਕਰ ਰਿਹਾ ਆਪਣੇ ਆਪਣੇ ਸ੍ਰੀ ਕਰਾ ਬਸਨਾ ਹੈ ਬਾਹਰੇ ਮਾਇਆ ਬਾਹਰੇ ਮਾਇਆ ਬਾਹਰੇ ਨਿਹਰੇ ਬਾਹਰੇ ਮਾਇਆ ਮਾਇਆ ਜਿਹੀ ਧੋੜਦੇ ਹਮਾਰਾ ਜੇ ਪੈਸੇ ਮਨ ਮਾਇਆ ਜਿਹੀ ਪੈਦਾ ਜੜਾ ਉਹ ਮਾਂ ਝੂਠਾ ਮਾਇਆ ਜਿਹਾ ਝੂਠੀ ਆ ਝੂਠੀ ਮਾਇਆ ਆਪ ਕੋ ਧਾਇਆ ਝੂਠੇ ਮਾਨੇ ਝੂਠੀ ਮਾਇਆ ਨਾਲ ਆਪਣੇ ਆਪ ਨੂੰ ਮੰਨ ਲੇ ਵੀ ਝੂਠਾ ਹੋਈ ਹਰ ਨਿਗਾਣ ਇਹਦੇ ਨਾਲ ਅਸੀਂ ਜੁੜ ਗਏ ਝੂਠੀ ਮਾਇਆ ਨਾਲ ਆਪਨਾ ਬੱਝੇ ਤਨਾ ਹੋ ਮੋਦਰ ਉਸੇ ਅਗਲੀ ਗਏ। ਭਾਣੀ ਜਦ ਲਭ ਜਾਣੇ ਮੁਝ ਤੇ ਕਸ਼ ਹੋਏ ਤਦ ਕੋਈ ਤਿਆਦੋ ਨਹੀਂ ਕੋਈ ਇਹ ਫਰਤਨਾ ਦਾ ਬਾਟ ਪਾੜੀ ਹੈ ਇਹਨੂੰ ਇਹ ਪਾਤਾ ਉਲਟਾ ਕਰਤਾ ਥਮ ਆਪ ਦਾ ਬਣ ਗਿਆ ਦੇਦਾਰੀ ਸਰਗੁਣ ਵੀ ਮੈਂ ਸਭ ਕੁਝ ਕਰ ਸਕਦਾ ਹਾਂ। ਪਰਮੈਸ਼ਰ ਨੂੰ ਬਣਾਤਾ ਸਰਗੁਣ ਯੋ ਨਹੀਂ ਕਰ ਸਕਦਾ। ਕਰਨਾ ਇਹ ਰੱਖ ਲਿਆ ਵੀ ਮੇਰੇ ਕੋਲ ਸਰੀਰ ਹੈ ਮੈਂ ਤਾਂ ਚੱਕਿਆ ਚੀਜ਼ੇ ਸੋ ਇੱਥੇ ਰੱਖਤੀ ਪਰਮੇਸ਼ਰ ਰੱਖ ਕੇ ਦਿਖਾਵੇ ਜਦੋਂ ਕੋਈ ਸਵੀਰੇ ਨੂੰ ਕੁਝ ਕਰੇ ਨਹੀਂ ਸਕਦਾ ਐ ਦਲੀਲ ਤੇ ਸਾਰੀਓ ਆਪ ਸਰਬਉੱਚ ਬਣ ਕੇ ਆਜ਼ਾਦ ਆਦਮੀ ਮੈਂ ਸਭ ਕੁਝ ਕਰ ਸਕਦਾ ਪਰ ਤਾਂ ਕਦੇ ਸਕਦਾ ਪਰਮੇਸ਼ਰ ਤੇ ਤਾਂ ਮੂਰਤੀ ਰੱਖ ਲਈ ਉਹ ਕਦੇ ਨਹੀਂ ਕਰ ਸਕਦੇ ਉਹ ਉਹ ਤਾਂ ਵੰਗਿਆ ਆਪਣਾ ਸੱਚੇ ਨਮਾ ਧਰਮ ਕਾਲ ਦੇ ਆਪ ਪੂਰਤੀ ਜੀ ਕਰੇ ਪੀਰਦੀਏ ਉਹ ਪੂਰਤੀ ਝੂਠੀ ਹੈ ਤਦ ਤੱਕ ਵੀਰ ਕਹਿੰਦਾ ਜੇ ਇਹ ਪੂਰਤ ਸੱਚੀ ਹੈ ਇਹ ਪੂਰਤ ਤੁਹਾਡੀ ਸੱਚੀ ਨਹੀਂ ਹੈ ਝੂਠੀ ਹੈ ਸੱਚੀ ਪੂਰਤ ਉਹ ਹੈ ਜਿਹੜੀ ਹਮੇਸ਼ਾ ਰਹਿੰਦੀ ਹੈ ਉਹਦਾ ਨਾਮ ਕੀ ਹੋਇਆ ਅਕਾਲ ਪੂਰਤ ਅਕਾਲ ਮੂਰਤ ਦਾ ਸਾਜੀ ਮੂਰਤ ਅਕਾਲ ਮੂਰਤ ਹੈ ਜਿਹੜੀ ਉਹ ਸਰਗੋਣਾ ਅਕਾਲ ਮੂਰਤ ਸਰਗੋਣਾ ਆ ਜਿਹੜੀ ਸਾਡੀ ਪੂਰਤ ਹੈ ਇਹੋ ਕੁਝ ਇਹ ਇਹ ਇਹ ਤਾਂ ਅਕਾਲ ਮੂਰਤ ਦੇ ਧੀਨ ਹੈ ਕੰਮ ਕਰਦੀ ਹੈ ਸਾਡੀ ਮੂਰਤ ਕੰਮ ਕਰਨ ਵਾਲੀ ਦਾ ਜ਼ਰੂਰ ਹੈ ਸਾਡੇ ਕੋਲ ਪਰ ਸਾਡੇ ਕੋਲ ਆਪਣੇ ਹਰਜੀ ਕੰਮ ਕਰਨ ਵਾਲੀ ਹੈ ਹਰਜੀ ਉਹਦੀ ਜਸੂਰ ਹੈ ਜੀ ਜੋ ਕੋ ਹੋ ਰਿਹਾ ਉਹ ਸਾਡੀ ਮਰਜ਼ੀ ਦੀ ਚੱਲ। ਪਰ ਉਹ ਆਜ ਤੋ ਜੀ ਇਥੇ ਰੱਖ ਕੇ ਛੋਟੀ ਗੱਲ ਨੂੰ ਜਿਵੇਂ ਸਾਡੇ ਹੈ ਇhtiyar ਤੇ ਇਹਨੂੰ ਦਿਖਾ ਕੇ ਉਹ ਅਸਲ ਤੇ ਉਹ ਬਿਲਕੁਲ ਹੀ ਖਤਮ ਕਰਦਾ। ਇਹ ਖਤਮ ਕਰਦਾ। ਜੇ ਇਹ ਵਹੀ ਹੈ ਜੋ ਮਜ਼ੂਰ ਖੁਦਾ ਹੁੰਦਾ ਹੈ। ਇਹ ਗੱਲ ਉਹਨਾਂ ਨੇ ਖਤਮ ਕਰ ਪਰ ਕਮੀਆਂ ਨੇ ਫੇਰ ਕੀ ਹੁੰਦਾ ਉਹ? আর ਸਾਰੇ ਬਗੁੱਲਦੇ ਨੇ ਪਾਈ ਜੋ ਕਰਦਾ ਫਰਮੈਸ਼ਰ ਹੁੰਦਾ ਤਾਂ ਹੋਈਏ ਅਸੀਰ ਨਾ ਵੀ ਆ ਕਦੇ ਮੁੱਕਰ ਜਾਂਦੇ ਇਹ ਦੁਬਦਾ ਇਹ ਆ ਤਾਂ ਬਨ ਜਾਂਦੇ ਆ ਹਾਂ ਭਾਈ ਜੋ ਕਰਦਾ ਹੋਈ ਉਸ ਜੇ ਆਪਣੇ ਹੱਥ ਜੋ ਹੋਵੇ ਕੁਝ ਕਰਨਾ ਤਾਂ ਸਾਰੇ ਪਦਾਰਥ ਆਪਣੇ ਫਿਰ ਜਿਨ ਨਕਲ ਗਏ ਉਸਕੇ ਹੱਥ ਹੋਏ ਤਾਂ ਸਭ ਕੁਝ ਲੈ ਜੇ ਦੇ ਹੱਥ ਜੁਬੇ ਸਭ ਕੁਝ ਕਿ ਆਵੇ ਲੱਲੇ ਫਿਰ ਅਧਿਆਤਮਾਲ ਦੀ ਕੀ ਲੋੜ ਹੈ ਤੇ ਉਹ ਨਾ ਮੋਦਰ ਹਟੇ ਘਟਣ ਦੀ ਕੀ ਲੋੜ ਹੈ ਸਰਮਾ ਦੇ ਤੇ ਸਾਡੇ ਬਸ ਵਿੱਚ ਹੈ ਕੁਝ ਸਾਡੇ ਬਾਅਦ ਵਿੱਚ ਕੁਝ ਨਹੀਂ ਚਲੋ ਸਮਾਜ ਤਾਂ ਤੇ ਕੁਝ ਹੋ ਸਕਦਾ ਇਹਦੀ ਅਗਿਆਨਤਾ ਹੈ ਆਦਮੀ ਦਾ ਉਹ ਤੇ ਇੰਟਰੇ ਦੀ ਅਗਿਆਨੀਆਂ ਸੁਤਾਦੇ उत्तजा पूरे ज्ञान वाले कौन ब्रह्म हो गए उत्तेजा बस बॉर्डर पार हो जाता है पूर्ण ब्रह्म वाला माया का पार हो जाता है जरूर पर जो ज्ञानी होता है हां तो हर तहसीलदार में काट चले जाते हां जी जब लग जाने मुझ से कुछ हुए सब इसको सुख ना ही कोई ਨਾ ਜਿਹੜੇ ਸਮਾਂ ਦਾ ਮੈਂ ਬੇਤਰ ਕੋ ਸੁਖਦਾ ਉਹ ਨਾ ਜਿਹੜੇ ਸੁਖੀ ਨਹੀਂ ਬਸਦਾ ਸੁਖੀ ਹੁੰਦਾ। ਬਸ। ਸੁਖ ਉਹਦਾਂ ਹੋਊਗਾ ਜਿੰਨੇ ਮਨਰੂ ਮੈਂ ਤੇ ਨਹੀਂ ਬਸਦਾ। ਜੋ ਮੈਂ ਕਰਤਾ ਉਹ ਵੀ ਮੈਂ ਨਹੀਂ ਕੀਤਾ ਜੋ ਨਹੀਂ ਮਤੇ ਹੋਇਆ ਉਹ ਵੀ ਉਹ ਜਿਵੇਂ ਨਾ ਤਾਂ ਅੰਝ ਮੇਰਾ ਕੋਈ ਜਿਵੇਂ ਤਾਂ ਕੁਝ ਹੋ ਗਿਆ ਨਾ ਇਹਦੇ ਵਿੱਚ ਮੇਰੀ ਕੋਈ ਕਲਾ ਹੈ। ਜਿਵੇਂ ਤਾਂ ਕੁਝ ਨਹੀਂ ਹੋਇਆ। ਨਾ ਇਹ ਮੇਰੀ ਕੋਈ ਵੇਖਤ। ਨਾ ਕੋਈ ਮੂਰਗ ਨਾ ਕੋਈ ਸੋਲਾ ਕੋਈ ਬੱਦਦਰ ਨਾ ਕੋਈ ਹਾਂ ਜਬ ਇਹ ਜਾਣੇ ਮੈਂ ਇੱਕ ਸਤਤਾ ਤਬ ਲੱਗ ਗਰਭ ਜੋੜ ਮੈਂ ਫਿਰਦਾ ਨਾ ਜਿਹੜੇ ਜੀਵ ਸੋਨਾ ਮੈਂ ਕੁਝ ਕਰ ਸਕਦਾ ਉਹ ਨਾ ਜਿਹੜੇ ਜੰਮਨ ਪੰਚਰ ਨਹੀਂ ਸਕਦਾ ਕੋਗਾ ਗਿਆਨਤਾ ਦੇ ਅੰਦਰ ਬੜੀ ਰਹਦੀ ਜੇ ਜੇ ਹੈ ਜੇ ਸੁੱਝੇ ਉਹ ਨਾ ਜਨਮ ਹੁੰਦਾ ਹੀ ਰਹੂਗਾ ਅ ਗਿਆਨਤਾ ਜਹਿਣਾ ਨਾ ਕੁਝ ਕਰ ਸਕਦਾ ਉਹ ਸਦਾ ਕੋਈ ਨਹੀਂ ਅਗਿਆਨਤਾ ਦਾ ਜਿਹੜਾ ਕਲੰਕ ਹੈ ਕਾਲਸਾ ਧੋ ਗਈ ਆ ਸਮਝ ਗਿਆ ਕੀ ਹੁੰਦਾ ਉਹ ਰਹਾ ਪਰਮਾ ਗੁਰ ਪ੍ਰਸਾਦ ਪਰਮਕਾ ਜਨਾ ਨਾਸ ਨਹੀਂ ਹੁੰਦਾ ਉਹਨਾਂ ਤੇ ਰੈਂਟਰੀ ਕੀ ਜਦ ਦਾ ਨਾਸ ਹੋ ਗਿਆ ਫਿਰ ਜੰਮੜਵਾਲਦਾ ਵੀ ਉਹਦਾ ਲੱਗ ਗਿਆ ਇਹ ਤਾਂ ਹੁੰਦਾ ਹੀ ਨਹੀਂ ਫਿਰ ਪੁੱਤ ਪਾਪ ਦਾ ਵੀ ਉਹਦਾ ਲੱਗ ਗਿਆ ਇਹ ਹੁੰਦਾ ਹੀ ਨਹੀਂ ਗਿਆਨ ਪਿਆਦਾ ਕਰਮੇ ਦਾ ਨਾਸ ਕਰਮੇ ਨਾਲਸ ਕਰਮ ਦਾ ਵੀ ਨਾਸ ਅਲੱਗ ਕਰਮ ਦਾ ਨਾਸ ਮੈਂ ਕਰਦਾ ਜਿਹੜਾ ਨਾਸ ਕਰਦਾ ਹੁੰਦਾ ਜਦ ਗਿਆਨ ਹੁੰਦਾ ਤੇ ਜਾਗਦਾ ਇਹ ਤਾਂ ਮੈਂ ਕਾਇਮ ਨਹੀਂ ਸਮਝਦਾ ਸੀ ਪਹਿਲਾਂ ਅਰੇ ਹਾਂ ਧਾਰੇ ਕੋ ਵੈਰੀ ਵੀ ਸਭ ਕਿਸੇ ਨੂੰ ਵੈਰੀ ਕਿਸੇ ਨੂੰ ਬਿੱਤਰ ਹੁੰਦਾ ਸੰਸਾਰ ਦੇ ਵਿੱਚ ਕਾ ਜੇ ਜਦੋਂ ਆਪਣਾ ਅਡੋਲ ਨਹੀਂ ਹੁੰਦਾ ਚਿੰਤਾ ਬਣੀ ਰਹਿੰਦੀ ਹੈ ਦੁਸ਼ਮਣਾਂ ਵਾਸਤੇ ਵੀ ਚਿੰਤਾ ਬਣੀ ਹੁੰਦੀ ਹੈ ਦੁਸ਼ਮਣ ਦੇ ਦੁਸ਼ਮਣੇ ਵੀ ਚਿੰਤਾ ਦਾ ਕਾਰਨ ਵਿਤਤ ਦਾ ਵੀ ਚਿੰਤਾ ਦਾ ਕਾਰਨ ਵਿਤਤ ਤੇ ਕੋਈ ਵਿਸ਼ਵਾਭੇਗੀ ਤੇ ਅਤੀਤ ਆਪਣੇ ਦੇ ਪੈ ਜਾਂਦੀ ਹੈ ਉਹਦੀ ਜਿੰਦਾ ਵੀ ਆਪਣੀ ਚਿੰਤਾ ਬਣ ਜਾਂਦੀ ਹੈ ਕਿੱਤਾ ਜਿੰਨਤਾ ਆਪਣੀ ਬਾਡੀ ਤੇ ਜਿੰਨਾ ਜਰ ਬੈਰੀਅਰ ਅਸੀਂ ਸਰਵਾਤਾ ਉਹਨਾਂ ਚਰ ਰੋਲ ਨਹੀਂ ਹੁੰਦਾ ਤੇ ਰੋਜ਼ ਕੋਈ ਨਾ ਕੋ ਹੋਦਾ ਹੀ ਜਾਂਦਾ ਸੰਸਾਰ ਉਹ ਮੇ ਤਰਕੜਾ ਕੋਈ ਹੁੰਦਾ ਰਿਸ਼ਤੇ ਦਾ ਆਰ ਮਤ ਤਰਤ ਹੋ ਹਾਂ ਜਨਾਬੀ ਦਾ ਲੋ ਤਾਂ ਮੇ ਕਹਾਂ ਜੇ ਬਹੁਤੀ ਚਿੰਤਾ ਨਹੀਂ ਇਹ ਹੋਤੀ ਵੀ ਭਾਈ ਭਰਾ ਨੇ ਤਨ ਕੋਗਾ ਜੋੜ ਜਾਣਾ ਇਹ ਵੀ ਜਿੱਸਾ ਹੀ ਜਾਣਾ ਪੈਣਾ ਪਿਆਰ ਬਹੁਤ ਹੈ ਸਮਝੇ ਚਾਰ ਚਾਹੇਗਾ ਵੀ ਜਾਣਾ ਪਰ ਇਹ ਵੀ ਤੇ ਚਿੰਤਾ ਹੀ ਹੈ ਇਹ ਵੀ ਚਿੰਤਾ ਹੀ ਹੈ ਹਾਂਜੀ ਜਦ ਲਗ ਮੋਹ ਮਗਨ ਸੰਗਮ ਆਏ ਜਦ ਲਗ ਸਫਰ ਆਏ ਦੇਸ ਹੋ ਵੀ ਕਿਤੇ ਭੁੱਲਣਾ ਜਾਈਏ ਨਹੀਂ ਚੱਲੇ ਜਿੱਤੇ ਉਹ ਫਿਰ ਤਾਂ ਭਜਾ ਕਰਦੇ ਰਹੇ ਭਜਾਣ ਲੈ ਉਹ ਨਹੀਂ ਜਲਦੀ ਗੱਲ ਕਰਦੇ ਹਾਂਜੀ ਜਦ ਲਗ ਉਹ ਮਗਨ ਸੰਗ ਮਾਇ ਤਬ ਲਗ ਧਰਮ ਰਾਏ ਦੇ ਸੁਜਾਇ ਅਜ ਜਨਾ ਜਰ ਮਗਨ ਮਾਇ ਦੇ ਵਿੱਚ ਮੋ ਹੈ ਇਹਦਾ ਉਹ ਅਗਨ ਸੰਗ ਮਾਇ ਤਬ ਲਗ ਧਰਮ ਰਾਏ ਦੇ ਸੁਜਾਇ ਕੀ ਜੀ ਸਜਦਾ ਉਹ ਹੋਇ ਆਈਆ ਜਦ ਇਹ ਸਰੀਰ ਛੱਡਦਾ ਨਾ ਜਦ ਇਹ ਲੈਂਦਾ ਸਰੀਰ ਧੜਨ ਕਰਦਾ ਉਦੋਂ ਤਾਂ ਸਜਾ ਬੰਦਾ ਜੀ ਹੈ ਉਦੋਂ ਨਹੀਂ ਬੰਦਾ ਸਜਾ ਸਜਾ ਛਤੰ ਵੇਲੇ ਬੰਦਾ ਹੈ ਫਿਰ ਜੇ ਪਕੜਿਆ ਨਾ ਨੂੰ ਸਰੀਰ ਨੂੰ ਉਹ ਹੋ ਜਾਂਦਾ ਹੈ ਉਹ ਤਾਂ ਹੋ ਜਾਂਦਾ ਹੈ ਫਿਰ ਜਦੋਂ ਉਹ ਮਗਰ ਸੰਗਮਾਇ ਹੋ ਜਾਂਦਾ ਹੈ ਤਾਂ ਫਿਰ ਤਬ ਲੱਗਦਾ ਇਰਾਈਲ ਭਰੇ ਸਾਲ ਤਲਪੀੜੇ ਘਾੜੀ ਫਿਰ ਜਿੰਨੇ ਜਲ ਕੱਢਦਾ ਹੱਦੋਂ ਕੋਪੜਟਾਏ ਉਹ ਜਿੱਦਾਂ ਜ਼ਮਾਨੀ ਗੱਡੀ ਹੈ ਅੱਡਾਂ ਕੋ ਘਟਾਇਓ ਉਹ ਉਦੋਂ ਦਾ ਸਜਾ ਹੈ ਉਹ ਹੈ ਕੋਈ ਇਹਦਾ ਦੱਤਾ ਦੀ ਜੇ ਤੂੰ ਆਉਣੇ ਜਿੰਦਾਬਾਦ ਨਿਕਲਦੇ ਜੀ ਮੈਂ ਬਚਾਵਾਤੀ ਕਰਨਾ ਪਊਗਾ ਇਹ ਸਜਾ ਜਾਣਾ ਨਹੀਂ ਚਾਹੁੰਦੀ ਜਾਣਾ ਨਹੀਂ ਜਾਣਾ ਸੀ ਮੈਂ ਇਜ਼ਰਾਇਲ ਫਰੇਸਾ ਤੇ ਪੀੜੇ ਕਾ ਲੀ ਜੀ ਉਹ ਤਾਂ ਸਜਾ ਹੀ ਹੈ ਜੀ ਹਾਂਜੀ ਜਦ ਲਗ ਕੋ ਮਗਨ ਸੰਗ ਮਾਇ ਤਬ ਲਗ ਧਰਮ ਰਾਏ ਦੇਸ ਹੋ ਜਾਏ ਉਹਨਾਂ ਜਿਹੜੇ ਸਜਾਇਆ ਕੋ ਮਗਨ ਸੰਗ ਮਾਇ ਹੋ ਗਿਆਨਤਾ ਕਰਕੇ ਹੀ ਆ ਦੇਖੋ ਉਹ ਤੇ ਕੀ ਕਿ ਜਿਹੜੇ ਜਦ ਤਾ ਗਿਆਨਤਾ ਹੀ ਹੋਈ ਨਾ ਉਹ ਮਗਨ ਸੰਗ ਮਾਇ ਕਿਉਂ ਆ ਗਿਆਨਤਾ ਕਰਦੇ ਆਣ ਜਾਣ ਤਾਂ ਜੇ ਜਾਣ ਆਪਣੇ ਆਪ ਜਾ ਆਪਣੇ ਆਪ ਸੁਰਜਿਕ ਬਦ ਬਚੇ ਪ੍ਰਮਾਤਮਾ ਕਲ ਉਹ ਬੋਧ ਹੀ ਵੀ ਗਲ ਅਗਿਆਨਤਾ ਕਰਕੇ ਹੀ ਕਾਰਨ ਉਹ ਵੀ ਅਗਿਆਨ ਹੈ ਬੋਧਾ ਕ੍ਰੋਧਾ ਲੋ ਸਾਰਿਆਂ ਦੀ ਜੜ ਅਗਿਆਨ ਅਗਿਆਨ ਹੈ ਹਾਂ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰ ਨਾਨਕ ਹੋ ਸੁੱਟੇ ਪ੍ਰਭ ਕਿਰਪਾ ਹੋ ਜੇ ਚਿਤਰਾ ਜੇ ਅਧਰ ਅਧਰਾਤਮਾ ਜਿਹੜੀ ਸਭ ਕੀ ਹੈ ਅਸਲ چھوٹਾ ਇੱਥਾ ਜੜਾ ਮਾਨ ਵਾਲਾ ਜਿੱਥੇ ਭਰਮ ਗਿਆਨਤਾ ਹੈ ਉੱਤੇ ਬੋਲ ਰਹੀ ਹੁਣ ਹੈ ਸਾਰੀ ਗੱਲ ਜਿਹੜਾ ਪ੍ਰਭਾ ਅੰਦਾਲਾਸ ਜਿੱਥੇ ਜੋ ਹੁੰਦਾ ਹੈ ਜੇ ਇਹਦੀ ਕਿਰਪਾ ਹੋ ਜਵੇ ਇਹ ਹੋਂ ਛੱਡ ਦਵੇ ਆਪ ਇਹ ਛੱਡ ਦਵੇ ਹੋਂ ਬੁੱਧੀ ਦਾ ਰੋਲ ਜਿਹੜਾ ਹੈਗਾ ਖਤਮ ਹੋ ਜਾਂਦਾ ਹੈ ਪਰ ਉਹ ਹੁੰਦਾ ਹੈ ਸੱਤ ਸਿਆਤਾ ਤੋਂ ਬਦਾ ਅ ਬਹੁਤੀ ਆਪਣੀ ਗੱਲ ਵਿੱਚ ਜਲਦੀ ਸੈਕਲ ਤੋਂ ਕਿ ਸਾਰਾ ਕਸੂਰ ਬੁੱਧੀ ਦੇ ਜਮ ਬੜਾ ਜਾ ਆਖਰੀ ਕਿ ਤਰ੍ਹਾਂ ਮੰਦੀ ਕੋਈ ਕਹਾਣੀ ਨਹੀਂ ਰਹਿ ਜਾਂਦਾ ਅੱਜ ਤੋਂ ਹਾਂ ਜੀ ਜੀ ਜਿਹੜੀ ਸੱਭਾ ਬੁੱਧੀ ਜਾਲੀਆ ਨਾ ਬੁੱਧੀ ਜਾਲੀਆ ਨਾ ਮਾਨਨਾ ਚੱਦੀ ਦੇ ਗੱਲੇ ਕੋਈ ਕਿੱਥੇ ਗੱਲ ਕਿੱਥੇ ਗੱਲ ਬੰਤੀ ਸੱਜਾ ਤੇ ਗੱਲ ਕਿੱਥੇ ਮਾਨਾ ਚੱਦੀ ਦੋਏ ਬੁੱਧੀ ਤੇ ਬਿੱਛੇ ਦੇ ਕੱਥੇ ਜੇ ਦੋ ਇਕੱਠੇ ਬੁੱਧੀ ਵੱਜਦੀ ਹੈ ਫਿਰ ਇਸੇ ਕਰਕੇ ਗੁਰੂਬਖਸ਼ੀ ਲਫਜ਼ਾਇਆ ਉਹ ਵੇਖੂਤੀ ਫਿਰ ਹਾਲਸਾ ਗਿਆਨ ਤੇ ਮਨਜੇ ਤੇ ਕਿਸੇ ਨੂੰ ਉਦੋਂ ਗਿਆਨ ਮਨਜੇ ਦੋਈ ਗਾਵਨ ਜੈਸ ਮਨਜੇ ਇੱਥੇ ਬਹੁਤ ਜਿਆਨ ਦੀ ਕਮੀ ਬੁੱਧ ਚ ਗਿਆਨ ਦੀ ਕਮੀ ਬੁੱਧ ਚ ਗਿਆਨ ਦੀ ਕਮੀ ਹੋਰ ਕੀ ਹੈ ਬੁੱਧ ਚ ਪਰਮਾ ਅਕਲ ਚ ਅਕਲੀਆਂ ਦਾ ਹਟਾ ਹੈ बुद्धि कमाई अकलै काटा ज्ञान काटा है हकल काटा इक्कुली गलती भाषा ही तो है ज्ञान बुद्ध काटा बुद्धि काटा बुद्धि काटा अकल काटा ये अकलती बेक्ति हुंदी है हुं बाद च ਅਕਲੇ ਸਰਮਸਾਰ ਹੁੰਦੀ ਆ ਜਦ ਕੋਈ ਗੱਲ ਨਹੀਂ ਕਰ ਸਕਦੇ ਆਪਾਂ ਆਪਾਂ ਕਹਿੰਦੇ ਬਾਹਰ ਲੱਗ ਆਪਾਂ ਦਾ ਇਹ ਲੋਕ ਸੋਚ ਬਣਾ ਵੀ ਕਰਦਾ ਆਪ ਵੀ ਕਹਿੰਦਾ ਅਕਲ ਦੇ ਨਾਲ ਕੰਮ ਨਹੀਂ ਕੀਤਾ ਆਪ ਹੀ ਅਕਲ ਨੂੰ ਕਹਿੰਦਾ ਆਪ ਖੁਦ ਵੀ ਅਕਲ ਨੂੰ ਕਹਿੰਦਾ ਮੇਰੀ ਮਾਰੀ ਗਈ ਆਹ ਉਹ ਮਾਰੀ ਗਈ ਅਕਲ ਨਹੀਂ ਇੱਕ ਆਉਂਗੀ ਕਬੀਰ ਕੀ ਕਹਿੰਦਾ ਕੱਲ ਕਬੀਰ ਦੱਸ ਗਿਆ ਸੀਗਾ ਆਜ ਉਹਦੀ ਲੋੜ ਪਈ ਉਹ ਖੋਲਣ ਦੀ ਲੋੜ ਪਈ ਤਰੀ ਕਬੀਰ ਮੈਰੀ ਬੁੱਧ ਕੋ ਜਮਨਾ ਬੈਠ ਰਸਤਾਰ ਕੋਈ ਥੋਮਾਈ ਹੋਈ ਆ ਗੱਲ ਸਾਰੀ ਪਾਣੀ ਹੋ ਕੇ ਗਈ ਇਸ ਕੋਈ ਥੋਮਾਈ ਹੋਈ ਨਹੀਂ ਵਿਅਖਿਆ ਨਹੀਂ ਕੀਤੀ ਵਾ ਕਿ ਜਿਵੇਂ ਐਸਾ ਨਹੀਂ ਸਕਦਾ ਜਿਨੇ ਹਰ ਨੂੰ ਜਿਨ ਕਬੀਰ ਮੇਰੀ ਬੁੱਧ ਕੋ ਮਹਿਦੂਰੇ ਕਿ ਆਪ ਮੇਰੀ ਬੁੱਧ ਕੋ ਜਮਨਾ ਕਰੇ ਤਿਸਕਾਰ ਜਪਨਾ ਕਰੇ ਤਿਸਕਾਰ ਜਿਨੇ ਜਮਨਾ ਸੱਜ ਕੇ ਜਿਨੇ ਜਪ ਕਾ ਸਾਫ ਕੇ ਜਪਿਆ ਸਰਜਣ ਹਾਰ ਕਿਉਂ ਨਹੀਂ ਤਿਸਕਾਰ ਕਰ ਸਕਦਾ ਇਹ ਆਦਾ ਤਿਸਕਾਰ ਹੈ ਤਿਸਕਾਰ ਕਰਦੀ ਡਾਂਟਣਾ ਘੂੜਨਾ ਜਲਾਇ ਕਹਿਣਾ ਵੀ ਤੋ ਨਲਾਇ ਕਹਿਣਾ ਤੇ ਨਲਕੀ ਕੀ ਤੇ ਇਹ ਸਤਕਾਰ ਕਰ ਸਤਕਾਰ ਤੋਂ ਉਲਟ ਤਰਸਕਾਰ ਹੈ ਦੇਖੋ ਤਾਂ ਸਤਕਾਰ ਇਹ ਜਿਹੇ ਪ੍ਰਸਤ੍ਰਸਕਾਰ ਇਹ ਜੇ ਸਤਕਾਰ ਤਾਂ ਹੈ ਜੇ ਬੁੱਧ ਪੂਰੀ ਹੋ ਜਵੇ ਜੇਜ ਭਰਮ ਰਹੇ ਨਾ ਜਦੋਂ ਇਹ ਭਰਮ ਆ ਰਿਹਾ ਉਹਦਣੇ ਪੱਤ ਸੇਧੀ ਕਰ ਜਾਊਗਾ ਉਹਦਣ ਇੱਜ਼ਤ ਨਾਲ ਘਰ ਚਲੀ ਜਾਊ ਜਿੱਦਾਂ ਅਜਰ ਕੁਝ ਵਿੱਚ ਕਲੰਕ ਨਹੀਂ ਬਣਦੀ ਜਾਣਾ ਉਹ ਨਾਲ ਜਦੋਂ ਨਾਲ ਜਦ ਤਾ ਇਹ ਜਦੋਂ ਤੁਸ ਜਾਓ ਵੀ ਤੋੜਨੀ ਕਲੰਕ ਦਾ ਵਿੱਚ ਚਲੋ ਤਰਸਕਾਰ ਹੋਇਆਗਾ ਜੇ ਨੂੰ ਵੀ ਹੋ ਜਾਵੇ ਵੀ ਮੈਂ ਹਾਂ ਜਾ ਕੇ ਕਿਟਰ ਵੀ ਧਿਆਵੋ ਸ਼ਾਇਦ ਉਤੇ ਤਰਸਕਾਰ ਹੋ ਜਾਮਨਾ ਕਰੇ ਤਰਸਕਾਰ ਕਿਉਂ ਜਿਹਨੇ ਜਮਉਂ ਸਰ ਜੀ ਕਰ ਗਿਆ ਜਦੋਂ ਜਵਾਬ ਪਰਬਲ ਵਿਸਤਾਰੋ ਜਦ ਵੇ ਆਇਦਾਓ ਪਰਬਲ ਤਗਾਰ ਜਾਣ ਲਿਆ ਇਹਦਾ ਜਮਾ ਬੜਾਇਆ ਹੁਕਮ ਜੀ ਨੇ ਬੜਾਇਆ ਮੈਂ ਹਾਕਮ ਜਾਣਦੇ ਹ ਇਹਨੇ ਹੁਕਮ ਬੜਾਇਆ ਉਹ ਹਾਕਮ ਜਾਣ ਲਿਆ ਉਹ ਜਮਕਾਲ ਹੈ ਜਮਕਾਲ ਹੈ ਤੇ ਕਾਜੀ ਕਾਲ ਹੁਕਮ ਹੈ ਕਾਲਾ ਕਾਲ ਕਰਦਾ ਹਸਿਆ ਆਉ ਪੂਰਨ ਪਰਮ ਗਿਆਨ ਲਿਆ ਉਹ ਅਬਰਪਨ ਜਾਣਾ ਬਹੁਤ ਸਭ ਤੋਂ ਵੱਡੀ ਗੱਲ ਹੈ ਪਰਮ ਬ੍ਰਹਮ ਅੰਡੜਾ ਬੁੱਝਣਾ ਉਹ ਗੱਲ ਹੋਊ। ਉਹ ਬੁੱਝੇ ਬਿਨਾ ਜਾਣ ਤੋਂ ਤੁਹਾਰੇ ਲੇਖੇ ਨਹੀਂ ਲੱਗਦਾ। ਬਸ ਉਹਦਾ ਸਿਰਫ ਇਹ ਹੈ। ਮੁਕਤਨਾ ਜਾਣੇ ਕੋਈ ਲੋ। ਇੱਥੇ ਨਹੀਂ ਸਬੂਤ ਵੀ ਮੁਕਤੀ ਕੌਣ ਪਾਵੇ। ਅਰੇ ਹੋਇਆ ਮੁਕਤ ਦੋਗੇ ਇਹ ਤਾਂ ਹੋ ਜਾਵੇ ਨਹੀਂ ਮੈਂ ਜਰੂਰ ਮੁਕਤੀ ਜਦ ਮਿਲੂਗੀ ਇਹ ਤਾਂ ਮੁਕਤੀ ਮਿਲਦੀ ਨਹੀਂ ਉੱਤੇ ਇਹ ਵੀ ਇਹ ਜੋ ਤੁਹਾਡੀ ਵੱਲ ਨਿਕਲਿਆ ਅਰੇ ਹੋਇਆ ਮੁਕਤੀ ਦੋਗੇ ਜੇ ਮੈਂ ਮਨ ਮਾਰ ਵੀ ਲਿਆ ਜੇ ਮੈਨੂੰ ਮੁਕਤੀ ਦੇਤੀ ਲੋਕਾਂ ਨੂੰ ਕਿਸ ਬੁੱਤਾਂ ਮੁਕਤੀ ਹੋਗੀ ਜਿੱਥਾ ਜਰੂਰ ਮੁਕਤੀ ਨੂੰ ਬਿਆਨ ਦੀ ਗੱਲ ਰਹੀ ਮੁਕਤੀ ਨੇ ਅਭੀ ਵੀ ਬਿਆਨ ਕੀਤਾ ਹੈ ਮੁਕਤੀ ਦੀ ਵੀ ਬਿਆਨ ਨਹੀਂ ਕਰ ਸਕਦਾ ਸਿੱਧਾ ਜੁੜਿਆ ਜੁੜੇ ਤੋਂ ਬਿਨਾਂ ਸ਼ਬਦਾਂ ਮੁਕਤੀ ਲਈ ਤੁਰਕੇ ਬਾਣੀ ਵੇਨਾ ਮੁਕਤੀ ਦੀ ਵਜਾ ਬਿਆਨ ਨਹੀਂ ਕਰ ਸਕਦਾ ਪਰ ਨੇ ਹੀ ਚੀਜ਼ ਅਸਲ ਇਹ ਬਿਆਨ ਕਰਦਾ ਫਿਰ ਠੀਕ ਹੈ ਜਿਨ੍ਹਾਂ ਬਿਆਨ ਕੀਂਦਿਆ ਚਾਹੇ ਗੁਰਬਾਨੀ ਦੀ ਦਿੱਤੀ ਹੈ ਜਾਂ ਨਹੀਂ ਕੀਤੀ ਚਾਹੇ ਜਦੋਂ ਦੂਹੇ ਲੇਖਨ ਮਹਾਰਾਜ ਨੇ ਕਦਮਾਂ ਫੜੀਆਂ ਨੇ ਕਬੀਰ ਜੀ ਚਾਹੇ ਉਹਨਾਂ ਦੇ ਦੂਹੇ ਤਰੀਕੇ ਨਾਲ ਲਿਖਿਆ ਅਸੀਂ ਕਿਸੇ ਤਰੀਕੇ ਨਾਲ ਵੀ ਆਗਰ ਕਬੀਰ ਨੂੰ ਪਤਾ ਤਾਂ ਲੱਗ ਜਾਣਾ ਮੇਰੇ ਨਾਲ ਪਤਾ ਤੁੰਗੜਾ ਨਹੀਂ ਲਿਖਿਆ ਸਾਡੇ ਲਿਖਿਆ ਹੋਇਆ ਇਹ ਤਾਂ ਪਹਿਲਾਂ ਵੀ ਲਿਖਿਆ ਹੋਇਆ ਇਹ ਪਾਸ਼ਾ ਤੋਂ ਅਲੱਗ ਪਾਸ਼ਾ ਨਾਲ ਕੀ ਕਿਸੇ ਦੁਬਾਰਾ ਜਤੇ ਭਾਸ਼ਾ ਜਿਆ ਤੋਂ ਪਹਿਲਾਂ ਉਹ ਭਾਸ਼ਾ ਹਰੂਬ ਉਹਨਾਂ ਨੇ ਇਹ ਕਹਤਾ ਮਰੇ ਤੋਂ ਮੁਕਤੀ ਮਿਲਣੀ ਆ ਮਰੇ ਦਾ ਮਤਲਬ ਸਰੀਰ ਦੀ ਮੌਤ ਹੀ ਗੱਲ ਹੈ ਇੱਥੇ ਗੱਲ ਕੀਤੀ ਸੀ ਜੁਗਾ ਬੋਲ ਜੇ ਮਰ ਜੂਗਾ ਸਰੀਰ ਛੱਡ ਕੇ ਆਪੇ ਮੁਕਤੀ ਮਿਲ ਜਾਣਾ ਉਹ ਨੂੰ ਮੁਕਤੀ ਕਹਤਾ ਕੋਈ ਜਿਹੜਾ ਮਰਣਾ ਜਾਣਾ ਕੋਈ ਮਰਦਾ ਮਰਦਾ ਜਗਮੋਤਾਂ ਹੋਈ ਸੀ ਗੱਲ ਇਹ ਨਾਲ ਇਹਦਾ ਮਤਲਬ ਇਹ ਆਉਂਦਾ ਕਿ ਮੁਕਤੀ ਨੂੰ ਜੇਕਰ ਪਰਣਾ ਜੋੜਦਾ ਅਸਲ ਤੇ ਗੱਲਾਂ ਬਹੁਤ ਗੁੰਡੂਈਆਂ ਆ ਜੇ ਚਾਹੀਏ ਕਿਉਂਕਿ ਧੋਣ ਜੋ ਬਹੁਤ ਸੋਖੀ ਗੱਲ ਹੈ ਜੇ ਉਹ ਵਿਚਾਰ ਕਰੀਏ ਬਹੁਤ ਡੁੱਬੀ ਚਲੀ ਜਾਂਦੇ ਕੋਈ ਕੋਈ ਹਮ ਤਾਂ ਸਭ ਪਤਾ ਹੈ ਜੇ ਜਿੰਦ ਨੂੰ ਹੀ ਹੱਦ ਕਰਕੇ ਨਿਕਲਣਾ ਹੈ ਜਿਹੜੇ ਦੁਨੀਆ ਕਰਦੀ ਹੈ ਫਾਇਦਾ ਕੀ ਹੋਇਆ ਓਪਰੇ ਜ਼ਪਰ ਤੇ ਨਾਲ ਜਿੱਥੇ ਤੱਕ ਦੀ ਪੜਾਈ ਤੁਸੀਂ ਪੜ੍ਹ ਲਈ ਉਹ ਤੋਂ ਤੱਕ ਗੱਲਾਂ ਦੀ ਗੱਲ ਅਸੀਂ ਕਰ ਸਕਦੇ ਹਾਂ ਤੁਸੀਂ ਜਿਹੜਾ ਜੋ ਪੜਿਆ ਹੈ ਨਾਲ ਲੈ ਕੇ ਇੱਕ ਨੁਮਾ ਇੱਜ਼ਤ ਦੇਖੋ ਵੀ ਇਹ ਜੋ ਦੇਖਣਾ ਜਿਹਨਾਂ ਅੱਖੀਂ ਉਹਨਾਂ ਸਾਰਿਆਂ ਨੂੰ ਮਿਲਾ ਕੇ ਦੋ ਦਰੂ ਇੱਕ ਨੁਮਾ ਜਮਰਣਾ ਹਰ ਵਾਰ ਫਿਰ ਉਹ ਜਿਹੜੇ ਨਵੇਂ ਪੜ੍ਹ ਜੋ ਨਾਲ ਜੁਗਹਾਨਾ ਮਾ ਪੜਾ ਐਸਾ ਮੇਰਾ ਨਹੀਂ ਸੁਣਨਾ ਹੁੰਦਾ ਵਿਜਨ ਨਾ ਮਾ ਬਣਦਾ ਜਾਊ। ਜਿਹੜੇ ਜਿਹੜੇ ਲੈ ਹੋਏ ਨੇ ਸਾਡੇ ਪਹਿਲੇ ਉਹਨਾਂ ਦੀ ਰੋਸ਼ਨੀ ਜਿਵੇਂ ਦੁੱਧੋਂ ਬਣੂਗਾ। ਉਹ ਹਾਂ। ਥੱਲੇ ਦੀ ਰੋਸ਼ਨੀ ਜਿਵੇਂ ਉਤੋਂ ਉਹ ਤੇਜ਼ ਰੋਸ਼ਨੀ ਵਾਲਾ ਵਿਜਨ ਬਣੂਗਾ। ਫਿਰ ਉਹ ਤੇਜ਼ ਹੋਣਗੇ ਉਹਨਾਂ ਵਿੱਚੋਂ ਫਿਰ ਹੋਰ ਤੇਜ਼ ਬਣੂਗਾ। ਛਾਂ ਉੱਚੇ ਤੋਂ ਛੇ ਤੋਂ ਸਟ੍ਰੌਂਗ ਲਾਈਟ ਹੋਊਗੀ ਉਹ ਵਿਜਨ। ਜਿਹੜਾ ਹੁਣ ਬਣੂਗਾ ਵਿਜਨ। ਅੱਜ ਇਸਟ੍ਰੌਂਗ ਹੈ ਉਹਦੇ ਨਾਲ भक्ति से अकेले मुक्ति थी के ब्रह्म तो मुक्ति मिलूगी. है तो मुक्ति मिलूगी. इसी भी कहने हु? पर मरना बहालै शरीर दा नहीं सी एनु मरदा नहीं गया होया एनु कह शरीर छड़ना शरीर त्यागाना ਉਹ ਜਿਉਂਦੇ ਵੀ ਤੇ ਅਗਿਆਸਰਦਾ ਇਹ ਮੋਟ ਉੜ ਜਾ ਉਹ ਵੀ ਚੱਗਿਆ ਵਰਦਾ ਹੀ ਬੰਦੇ ਨੇ ਜਿਵੇਂ ਉਹਨਾਂ ਨੇ ਕਿਹਾ ਤੇਰੇ ਨਾਲ ਜਾਣਾ ਮਾਨਸ ਤੇ ਹਰਕਾ ਸੇਵਕ ਸੋਹਰ ਜਿਹਾ ਤੇਰੇ ਨਾਲ ਜਾਣਾ ਕੋਲ ਤੇ ਕਹਿੰਦੇ ਭਾਈਓ ਮਰਿਆ ਹੋਇਆ ਜਦੋਂ ਸਰੀਰ ਛੱਡਿਆ ਹੋਇਆ ਸੀਰ ਦੀ ਚੁੱਤਾ ਛੱਡੀ ਹੋਈ ਆ ਜਿਹੜਾ ਹੈਗਾ ਸਰੀਰ ਤੇ ਤਾ ਉਹਦਾ ਤਾਕਤ ਉਹਦੀ ਜਿਮੜ ਵਾਲੀ ਹੁੰਦੀ ਏ ਬਿਲਕੁਫਾਰ ਖਜਾਏ ਜੇ ਧੁਖਦੇ ਹੈ ਜੇ ਦੁਖਦੇ ਹੈ ਅੱਤੇ ਸਾਰੇ ਰਾਜ ਸੁਖਵਿਤ ਤੇ ਟੈਂਕ ਦੇ ਕੋ ਖਰੇਦਾ ਇਦੀ ਰਾਜਾਂ ਸੁਖ ਵਿੱਚ ਸੁਖ ਨਾਈ ਤੋ ਕਰ ਕੋ ਸ਼ਰੀਰ ਨਾ ਰੋਏ ਕਹਣਾ ਚੱਲ ਸਾਨੂੰ ਫੌਜ ਹੈ ਲੋਕ ਰੱਖ ਜਾਏ ਕੋਈ ਲੋੜ ਨਹੀਂ ਭਾਇਆ ਸੋ ਮਰਨਾ ਕਹਿਨੇ ਨਾ ਮਾਂਤਾ ਬੋਲੀ ਤੇ ਹੀ ਮਰਨਾ ਇਹ ਖਿਆਲ ਤੇ ਪੱਕਾ ਅੰਦਰੋਂ ਆਇਆ ਤਾਂ ਮਰਿਆ ਹੋਇਆ ਉਹ ਆਵੇ ਮਰ ਲਾ ਮੰ ਲੈ ਸੀ ਛੱਡਣ ਮਿਲ ਜਾਣੀ ਜਦ ਕੇ ਭਰਨ ਦੇ ਵੇਲੇ ਕਾਸ਼ੀ ਕੇ ਉਪਦੇਸ਼ ਕਰਦੇ ਨੇ ਉਹ ਆਹੀ ਕਰਦੇ ਨੇ ਆਪਣੇ ਨਾਲ ਭਰਨ ਵੇਲੇ ਕਰਦੇ ਨੇ ਉਪਦੇਸ਼ ਜੋ ਕਾਸ਼ੀ ਉਪਦੇਸ਼ ਦੈ ਮਾਨਸਬਗ ਤੇ ਬਾੜ ਉਹ ਫੇਰ ਆਹੀ ਉਪਦੇਸ਼ ਕਰਦੇ ਨੇ ਮੈਂ ਇਹ ਐਵੇਂ ਸੁਕਣਾ ਸੀ ਉਹ ਨਾ ਪਾੜੀਏ ਤੇਰਾ ਕੁਝ ਨਹੀਂ ਸੀ ਫੇਰ ਇਹ ਉਹ ਫੇਰ ਕਬੀ ਛੱਡ ਦੂ ਉਸ ਬੜੇ ਹੋ ਕੇ ਜੋ ਫਿਰ ਮੋਢੇ ਮੋਢੇ ਸੰਗੜਾ ਨੂੰ ਬੈਲਡ ਕਰਦੇ ਉਹਨਾਂ ਕਹਿੰਦੇ ਨੇ ਵੀ ਕੱਚਾ ਬੇਮਤ ਉਹੜ ਦਈਏ ਨੂੰ ਐ ਤੋੜ ਦੂ ਉਹ ਉਹਦਾ ਸਾਰੀ ਜ਼ਿੰਦਗੀ ਜੇ ਗਿਆਨ ਕਰੀ ਜਬ ਤਨੀ ਟੁੱਟਦਾ ਸਾਰੀ ਜਿੰਦਗੀ ਨੂੰ ਲੁੱਟ ਕੇ ਖਾ ਲਿਆ ਹੋਰ ਪੜਾਈ ਪੜਾ ਕੇ ਉਹ ਕਹਾਂਦਾ ਨੇ ਵਾਂਗ ਦਰਦੀ ਪੜਾ ਇਪੜਾ ਕੇ ਬਹੁਤ ਕਲਪੜਾਈ ਪੜਾ ਕੇ ਸਾਰੀ ਜ਼ਿੰਦਗੀ ਉਹਨੇ ਤਾਂ ਬਣ ਰਿਹਾ ਤਾ ਝੂਠੀ ਮਾਇਆ ਨਾਲ ਕਿ ਖੁਦ ਖੁਦ ਨੂੰ ਪੜਾ ਕਿ ਮੈਂ ਖੁਦ ਸਮਝੀ ਸੁਖਾ ਪਟੇ ਗਾਸ ਨੂੰ ਸੀ ਜੇ ਪਾਏ ਗੱਲ ਜੇ ਮੰਨ ਲੋ ਇਹ ਇੱਕ ਸ਼ੁਰੂਦਈ ਜੁਨਾ ਹੈ ਬੜਾਈ ਜੁਨਾ ਹੈ ਸ਼ੁਰੂਦ ਪੜਾਉਂਦੇ ਤਾਂ ਉਹ ਦਾ ਜਿਹੜਾ ਸੀ ਚੜਾਵਾ ਇਸੇ ਹੀ ਇਹ ਮੰਦਰ ਨੂੰ ਸਭ ਖਤਮ ਨਾ ਹੋ ਸਕਦਾ ਫੇ ਦੇ ਵੀ ਦੇ ਖਤਮ ਨੇ ਸਾਰੇ ਜੋੜਣੋ ਸਰ ਢਿੱਡ ਜਿਹੜਾ ਢਿੱਡਾ ਹੈ ਨਾ ਭੁੱਖ ਢਿੱਡਦੀ ਉਹਦੀ ਵਜ੍ਹਾ ਹੈ ਕੁਛ ਨਹੀਂ ਸੋਰ ਚ ਜਨੇ ਅਪੀ ਲੋੜ ਧਰਮ ਦੇ ਹਿੱਟ ਹਾਂਜੀ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋਂ ਟੁੱਟੇ ਸਭ ਕਿਰਪਾ ਦੇ ਬੰਧਨ ਟੁੱਟੇ ਜੇ ਪ੍ਰਭ ਕਿਰਪਾ ਕਰੇ ਛੜਦਵੇਂ ਹੈ ਉਹ ਛੜਦਵੇਂ ਉਹ ਉਸਨੇ ਕਹਿੰਦੀ ਆ ਪਰਮ ਜਪੋ ਹੈ ਬੁਵੇਕ ਜਪੋ ਹੈ ਜੋ ਬਵੇਕ ਹੈ ਜ਼ਰੂਰ ਜੇ ਨਾ ਵੀ ਥੋੜਾ ਬਵੇਕ ਹੈ ਪੂਰਾ ਜੀ ਨਾ ਉਹ ਬਵੇਕੀ ਹੈ ਜਿਹੜਾ ਉਹਦੇ ਵਿੱਚ ਬਵੇਕ ਪੂਰਾ ਨਹੀਂ ਹੁੰਦਾ ਬਵੇਕ ਪੂਰਾ ਨਹੀਂ ਹੋਇਆ ਇਹ ਕਹਿੰਦਾ ਤੇ ਉਹਦਾ ਕੋ ਪੂਰਾ ਨਹੀਂ ਉਹ ਕਹਿੰਦੇ ਪੂਰਾ ਤਾਂ ਹੋ ਜੇ ਕਿਰਪਾ ਕਰੇ ਆਪਣੇ ਅੰਦਰੋਂ ਕਵੀ ਕਰ ਦੋ ਜਾਣ ਕੇ ਰੱਖੀਓ ਆਪਣੇ ਅੰਦਰ ਜੇ ਬਵੇਕ ਕਵੀ ਹੈ ਮੇਰੇ ਚ ਤਾਂ ਆ ਮਾ ਕਮੇ ਪੂਰੀ ਕਾਦੀ 14 ਜੀ ਚਾਉਂਦੇ ਅਸੇ ਹੀ ਬਵੇਗ ਦੇ ਵਿੱਚ ਕਮੇ ਪੂਰੀ ਕਾਫੀ ਚਾਉਂਦੇ ਨਹੀਂ ਸੁਵੇਗ ਦੀ ਕਾੜ ਕਿਸੇ ਨੇ ਮਹਿਸੂਸ ਕਦੇ ਕੀਤੀ ਹੋਈ ਨਹੀਂ ਜਿੱਦਾਂ ਸਾਡੇ ਬਵੇਗ ਦੀ ਕਮੀ ਪੂਰੀ ਹੋ ਗਈ ਉਹ ਤਾਂ ਬਵੇਕਾਫੇ ਬਣ ਜਾਣੀ ਹੈ ਇਹ ਬਵੇਗ ਇਹ ਜਿਹੜਾ ਇਥੋਂ ਲੈ ਰਹੇ ਹਾਂ ਗੁਬੇਕਿਆਂ ਦੇ ਖੁਰਾਕਾਂ ਜਿਆਦੀ ਹੁੰਦਾ ਲੋਬੇਕੀ। ਰੁਮ ਕਾਨੇ ਦਾ ਭੋਜਨ। ਕਿ ਉਹ ਭੋਜਨ ਹੈ ਗੁਬੇਕੀ। ਜੇਕਰ ਇਹ ਕੇਵਲ ਕੋਈ ਭੋਜਨ ਜਿਹਨੂੰ ਆਤਮਾ ਸੁੱਤ ਆਤਮਾ ਖਾਂਦੀ ਹੈ ਉਹ ਕੀ ਸੱਚ ਖਾਣਾ ਸੱਚ ਵਰ। ਗੁਬੇਕ ਦਾ ਦੂਆ ਨਾ ਸੱਚ।